एयरपोर्ट ने रेशी नंदी है जरा सोच मेरे नीर को माघ ठंडे नीर बाहर खुला ही मैदान है ना कोई शपर मकान नहीं कपड़ा बिशान <coughs> नहीं कोई मंजा इंतजाम है चौका चूल्हा ना कोई ਤਵਾ ਪ੍ਰਾਰਥਨਾ ਰਸੋਈ ਨਾ ਕੋਈ ਪੱਕਾ ਪਕਵਾਨ ਹੈ ਨਾ ਕੋਈ ਬਾਪ ਭੈਣ ਮਾਈ ਨਾ ਕੋਈ ਮਿੱਤਰ ਨਾ ਭਾਈ ਨਾ ਕੋ ਪੁੱਤਰ ਨਿਸ਼ਾਨ ਹੈ ਪੱਲੇ ਪੈਸਾ ਨਾ ਪਾਈ ਨਾ ਕੋ ਦੌਲਤ ਕਮਾਈ ਇਕੋ ਨਾਮ ਹੀ ਕੁਜ਼ਰਾਨ ਹੈ ਇਕੋ ਆਸਰਾ ਕਾਜ ਚੀਨੀ ਵਾਲਾ ਕਲਾਧਾਰ ਸਾਨੂੰ ਉਸੇ ਤੇ ਹੀ ਮਾਨ ਹੈ ਇਹ ਉਸ ਵੇਲੇ ਸ਼ੀਖਾ ਦੇ ਵਿਚਾਰ ਇਸ ਵੇਲੇ ਮਲੇਰਕੋਟਲੇ ਦੇ ਸਾਕੇ ਤੋਂ ਬਾਅਦ ਮਜ਼ਾਮ ਦੇ ਵਿੱਚ ਪੈਛੇ ਹਨ ਆਏ ਛੱਡ ਘਰਬਾਰ ਔਰ ਛੱਡਿਆ ਪਿਆਰ ਇੱਕੋ ਗੁਰੂ ਮਾਨਤਨ ਹੈ ਲੋਕ ਸੈਂਕੜੇ ਹਜ਼ਾਰ ਲੋਕ ਆਏ ਪੈਂਡਾ ਮਾਰ ਕਠ ਹੋਇਆ ਹੀ ਮਾਨ ਹੈ ਹੀਰਾ ਸਿੰਘ ਜ세ਦਾਰ ਲਹਿਣਾ ਸਿੰਘ ਸਰਦਾਰ ਜੀ ਵਾਲੇ ਦਾ ਧਿਆਨ ਹੈ जेदी उपमा महान किटा भाणा प्रवान किटा चंडा निशान है सिंघा किता स्नान है जप चिती माला नाम होना धर्म तो प्रवान है साडा देश हिंदुस्तान नहीं, नहीं रखना गुलाम साडा यही विधान है बाहरो आया हुक्मरान किता देश है गुलाम ਗੋਰਾ ਬੜਾ ਹੀ ਸ਼ੈਤਾਨ ਹੈ ਨਾਲੇ ਰਾਦੇ ਬੇਈਮਾਨ ਨਾ ਕੋਈ ਧਰਮ ਤੇ ਇਮਾਨ ਅਸੀਂ ਪਟਨਾ ਨਿਸ਼ਾਨ ਹੈ ਕਰੋ ਆਏ ਉਠਾਨ ਸਿਰ ਬਨ ਖੁਫਨਾਣ ਸੀਸ ਭੇਟ ਪਰਵਾਨ ਹੈ ਤੇਰੀ ਤੋਪ ਬੰਦੂਕ ਸਾਡੀ ਜੁੱਤੀ ਨਹੀਂ ਕੂਟ ਨਾਮ ਮਾਲਾ ਹੀ ਜਪਾਨ ਹੈ ਤੋਪ ਕਰ ਲੈ ਤਿਆਰ ਕੇ ਬੜਾ ਹੁਸ਼ਿਆਰ ਸਾਡਾ ਜਨਮਾਂ ਦਾ ਕੰਮ ਹੈ ਇਹ ਅਸੀਂ ਹੁਣੇ ਨਹੀਂ ਛੇਡ ਲੋ ਠੀਕ ਹੋਣ ਲੱਗੇ ਜਨਮਾਂ ਜਨਮਾਂ ਤੋਂ ਸਾਡਾ ਇਹ ਕੰਮ ਹੈ ਸਾਡੀ ਤੈਨੂੰ ਹੈ ਬੰਗਾਲ ਦਿਨ ਕੱਟ ਲੈ ਤੂੰ ਚਾਰ ਆਖਰ ਤੇਰਾ ਹੀ ਚਰਨ ਹੈ ਜਿਹੜਾ ਤੈਨੂੰ ਹੈ خیال ਪਤਾ ਲੱਗੂ ਆਖਰ ਝੂਠਾ ਰਾਜ ਦਾ ਗਮਾਨ ਹੈ ਤੇਰੀ ਜਿੱਤ ਅੰਦਰ ਹਾਰ ਤੇਰੀ ਤੈਨੂੰ ਆਵੇਗੀ ਵਿਚਾਰ ਸਾਡੀ ਜਿਤ ਪਰਵਾਨ ਹੈ ਦੇਸ਼ ਭਗਤੀ ਦੀ ਕਾਰ ਖੇਤੀਬੀ ਦੀ ਵਿਚਕਾਰ ਇਹੋ ਪ੍ਰਭੂ ਫਰਮਾਨ ਹੈ ਜੁਗੋ ਜੁਗੋ ਇਹੋ ਖੇਰ ਜੁਗੋ ਜੁਗੋ ਇਹੋ ਖੇਰ ਚੜਾ ਆਉਂਦਾ ਹੈ ਮੇਰਾ ਇਹੋ ਰੱਬ ਦਾ ਬਧਾਈ ਹੋ ਰੱਬ ਦਾ ਬਧਾਨ ਹੈ 51 ਸੱਤੋਕਾਂ ਬਿੜੀਆਂ ਉੱਥੇ ਫਿਰ ਤੇਰਾ ਸਿੰਘ ਜੀਵਾ ਸੇ ਆਪ ਉੱਥੇ ਤੋਂ ਪਾ ਕੇ ਖੜੇ ਹੋ ਹੀਰਾ ਸਿੰਘ ਅੱਜ ਖੜਾ ਹੈ ਤੋਪ ਅੱਗੇ ਤੋਪ ਚੱਲੀ ਨਾ ਸਿੰਘ ਹੋ ਹੋਇਆ ਐਵੇਂ ਕਰਦਾ ਅੱਖਾਂ ਚੂਨੀ ਮੈਂ ਕਿਉਂ ਸਤਿਗੁਰ ਮੇਰੇ ਦਾ ਹੁਕਮ ਆਪਾਰ ਹੋਇਆ ਤੋਬ ਬੰਦ ਕੀ ਟੀਟੈ ਨੂੰ ਦਸਣੇ ਲਈ ਹੁਕਮ ਨਾ ਦੇ ਹੋ ਖੇਡਾਰ ਹੋਇਆ ਕਿਨੀ ਵਾਰੇ ਨੇ ਸਮਝ ਲਈ ਨਹੀਂ ਤੇਰੀ ਹੁਣ ਗਉਆਂ ਦੇ ਗਲੇ ਤੇ ਵਾਰ ਹੋਇਆ ਇਸ ਵਿੱਚ ਹੈਂ ਤੇਰੇ ਦੋ ਮਕਸਦ ਮਾਸ ਖਾਣਾ ਤੇ ਧਰਮ ਪ੍ਰਿਸ਼ਟਾਰ ਹੋਇਆ ਫੁੱਟ ਪਾ ਕੇ ਕਰਨਾ ਅੱਖ ਪਰਖੀ ਤੇ ਸੇਖ ਹੁਸ਼ਿਆਰ ਹੋਇਆ ਇਸ ਲਹਿਰ ਨੂੰ ਖਤਮ ਨਾ ਕਰ ਸਕਤੇ ਕੀ ਹੋਇਆ ਜੇ ਅੱਜ ਦੁਖਿਆਰ ਹੋਇਆ ਜਿੱਥੇ ਜੀ ਚਾਹੇ ਉਸ ਨੂੰ ਲੈ ਜਾ ਤੂੰ ਜੱਗ ਦੇਖੇਗਾ ਤੈਨੂੰ ਬਰਬਾਦ ਹੋਇਆ ਤੇਰੇ ਜਬਰ ਨੂੰ ਸਬਰ ਨਾਲ ਕੱਟਣੇ ਲਈ ਚੀਨੀ ਵਾਲਾ ਹੈ ਅੱਜ ਅਵਤਾਰ ਹੋਇਆ ਖੋਲੂ ਦੰਤ ਤੇਰੀ ਹੀ ਜੇਹਰ ਅੰਦਰ ਇਹ ਧਰਮ ਦਾ ਹੁਕਮ ਆਕਾਲ ਹੋਇਆ ਮਾਰ ਕੀ ਤੇਰੀ ਉਹ ਫੇਲ ਕਰੀ ਬਾਈ ਕਾਟ ਦਾ ਬਾਈ ਕਾਟ ਦਾ ਮੁਸਕਾ ਤਿਆਰ ਹੋਇਆ ਉਸੀ ਤੋਬ ਹੈ ਖੋਟ ਗੋਲਾ ਖਾਲੀ ਜਾਵੇ ਨਾ ਨਾਮ ਦਾ ਬਾਰ ਹੋਇਆ ਤੇਰੀ ਤੋਬ ਦੇ ਗੋਲੇ ਤੋਹਾ ਕਾਲੇ ਅਗਲੇ ਜਨਮ ਜਾ ਨੂੰ ਧਾਰਾਂਗੇ ਕੁਦਰ ਦੇਸ਼ ਧਰਮ ਤੇ ਕੌਮ ਬਚਾਨ ਖਾਤਰ ਇਸ ਦੇਸ਼ ਦੀ ਹਾਂਜੀ ਠੀਕ ਇਸ ਦੇਸ਼ ਦੇ ਵਿੱਚ ਡਾਕੂ ਬਹੁਤੇ ਆਏ ਨੀਤ ਚੰਦਰੀ ਲੁੱਟ ਮਚਾਨ ਖਾਤਰ ਤੂੰ ਵੀ ਜਾਏਂਗਾ ਜਿੱਧਰ ਹੋ ਗਏ ਪਿੱਛੇ ਰਾਂ ਲੰਬੇਗਾ ਝਾਂ ਦੁਕਾਨ ਖਾਤਰ ਖਤਮ ਹੋਣਗੇ ਤੇਰੇ ਉਹ ਬੂਟ ਚੱਟੂ ਖਤਮ ਹੋਣਗੇ ਜੂਨ ਦੀ ਖਾਨਖਾ ਵਾਸਤ ਚੋਰੀ ਕਰੀ ਨਾ ਕਦੇ ਵੀ ਬਲੰਦੀ ਵੇ ਝੂਠ ਬੋਲ ਕੇ ਕੀ ਹੋਇਆ ਜੇ ਸ਼ਹਿਨशाह ਹੋ ਗਿਆ ਤੂੰ ਦੁਨੀਆਂ ਸਾਰੇ ਤੇ ਰਾਜ ਕਰਾਉਣ ਖਾਤਰ ਸੂਰਜ ਛਿਪ ਜਾਸੀ ਕਦੇ ਚੜੇਗਾ ਨਾ ਅਤ ਸੁੱਕੀ ਜੋਦ ਨੂੰ ਕਮਾਉਣ ਖਾਤਰ ਹੁਕਮਸਤੂ ਹੁਣੇ ਹੀ ਆ ਚੁੱਕਾ ਤੋਪ ਦਾਗ ਤੇ ਭਾਰਮ ਸ਼ਾਨ ਬਦਲੇ ਚੀਨੀ ਵਾਲ ਨੇ ਮੁੜ ਕੇ ਫੇਰ ਆਣਾ ਰਹਿੰਦਾ ਕੰਮ ਜੋ ਪੂਰਾ ਬਦਲੇ ਮੌਕਾ ਮਿਲਿਆ ਸੀ ਤੈਨੂੰ ਬੇਵਾਰ ਖਾਤਰ ਬੰਨ ਚਤਰ ਬੈਠਾ ਹੁਕਮਰਾਨ ਬਦਲੇ ਤੋਪ ਚੱਲੇਗੀ ਗੁਰੂ ਦੇ ਹੁਕਮ ਅੰਦਰ ਹੁਕਮ ਨਾਲ ਸ਼ਹੀਦیاں ਪਾਣ ਬਦਲੇ ਮਤ ਸਮਝੀ ਤੂੰ ਮੌਤ ਹੈ ਹੱਥ ਤੇ ਪਾ ਤੇਰੇ ਹੀ ਸਿਰ ਚੜ੍ਹਾਣ ਬਦਲੇ ਅਸੀਂ ਜਾਂਦੇ ਹੱਥ ਤੇ ਗੁਰੂ ਪੁਰੀ ਨੂੰ ਨਾਰਕ ਤਾ ਪੈਗਾ ਤੈਨੂੰ ਕਪਾਣ ਬਦਲੇ ਧੋਪਾ ਚੱਲੀਆਂ ਗੜਗੜਾਂ ਹੋ ਕੇ ਅਸੀਂ ਫੀਸ ਲਗੇ ਹਿੰਦੁਸਤਾਨ ਬਦਲੇ ਬਹੁਤ ਬਤਨਵਾ ਪਿਛਾ ਕੀ ਦੇਖ ਰਹੀ ਪ੍ਰਾਪਤ ਸਭ ਬਣ ਮਿਲਿਆ ਸੋ